ਮੈਂ ਤੇ 9-10 ਮਹੀਨੇ ਕਿਸੇ ਮਾਂ ਦੀ ਕੁੱਖ ਵਿੱਚ ਰਹਿ ਕੇ ਫੇਰ ਗੁਮਾਨਾ ਆਵਾਂਗਾ ਜਨਮ ਲੈ ਕੇ ਤੇਰੇ ਨਾਲ ਲੜਦੇ ਰਹਾਂਗੇ ਤੈਨੂੰ ਹਿੰਦੁਸਤਾਨ ਚੋਂ ਕੱਢ ਕੇ ਫੇਰ ਸ਼ਾ ਲਵਾਂਗੇ ਤੈਨੂੰ ਹਿੰਦੁਸਤਾਨ ਆਜ਼ਾਦ ਕਰਾਉਣਾ ਪਏਗਾ ਕਰਨਾ ਪਏਗਾ ਇਸੇ ਤਰ੍ਹਾਂ ਹੀ ਹੋਇਆ ਉਹਨਾਂ ਤੋਂ ਬਾਅਦ ਕੋਈ ਉਧਮ ਸਿੰਘ ਬਣ ਕੇ ਆ ਗਿਆ ਕੋਈ ਭਗਤ ਸਿੰਘ ਬਣ ਕੇ ਆ ਗਿਆ ਕੋਈ ਕਿਸੇ ਰੂਪ ਵਿੱਚ ਆ ਗਿਆ ਮੈਂ ਅਰਜ ਕਰ ਰਿਹਾ ਸਾ ਗੁਰਸਿੱਖ ਜਮੀਰ ਕਰਕੇ ਨਹੀਂ ਮਰਦਾ ਸਤਿਗੁਰੂ ਆ ਤੇ ਜੇ ਰ ਜਮੀਰ ਕਰਕੇ ਮਰ ਜਾਂਦਾ ਉਹ ਜਿਉਂਦਾ ਹੀ ਬਲਿਆ ਹੋਇਆ ਹੁੰਦਾ ਉਹ ਵਿੱਚ ਤੇ ਜੂ ਵਿੱਚ ਹੀ ਸਾਥ ਹੈ ਨਹੀਂ ਜਿਉਂਦੇ ਕੇ ਚਲਦੇ ਫਿਰਦੇ ਮਰਦੇ ਨੇ ਸੰਸਾਰ ਵਿੱਚ ਜਿਨ੍ਹਾਂ ਨੂੰ ਗੁਰੂ ਦੀ ਰਖਸ਼ਤਾ ਨਹੀਂ ਹੋਈ RAM ਦੀ ਰਖਸ਼ਤਾ ਨਹੀਂ ਹੋਈ ਉਹ ਮਰਦੇ ਨੇ ਕਬੀਰ ਕਹਿੰਦਾ ਮੈਂ ਨਹੀਂ ਹੁਣ ਮਰਾਂਗਾ ਮੈਂ ਨਾ ਮਰੋ ਮਰ ਮੋ ਸੰਸਾਰਾ ਕਹਿੰਦੇ ਆਪ ਕੈਸੇ ਮਰੋ ਮਰਨ ਮਨ ਮੰਨਿਆ ਮੇਰਾ ਮਰਨ ਨੂੰ ਹੋਏ ਮਨ ਮੰਨ ਗਿਆ ਮੈਨੂੰ ਇਹ ਸਮਝ ਆ ਗਈ ਹੈ ਕਿ ਮੌਤ ਕੀ ਹੈ ਮੌਤ ਨਹੀਂ ਮਰਨਾ ਨਹੀਂ ਐਵੇਂ ਤਬਦੀਲੀ ਆ ਥੋੜੀ ਜਈ ਬਸ ਇਨਾ ਕੀ ਫੜ ਕੇ ਕਰੀਰ ਦੇ ਉਮਰ ਲਿਆ ਕਹਿੰਦਾ ਤਬਦੀਲੀ ਹੋ ਸਕਦੀ ਹੈ ਮੈਂ ਵੀ ਮਰ ਸਕਦਾ ਮਰਾਂ ਕਿਸ ਤਰ੍ਹਾਂ ਹੁਣ ਪਤਾ ਲੱਗ ਗਿਆ ਕਿ ਮਰਨਾ ਕੀ ਹੈ ਇੱਕ ਛੋਟੇ ਨਵੇਂ ਜੀਵਨ ਮਿਲੇਗਾ ਸਰੀਰ ਪੁਰਾਣਾ ਹੋ ਗਿਆ 120 ਸਾਲ ਦੀ ਉਮਰ ਕਰੀਰ ਦੀ ਹੈ 1455 ਦਾ ਜਨਮ ਹੈ 1575 ਦਾ ਵਿਆਹਤ ਹੈ ਪੂਰੇ 120 ਸਾਲ ਹੁਣ 120 ਸਾਲ ਦਾ ਬਜ਼ੁਰਗ ਹੋਵੇ ਤੇ ਉਹ ਤੇ ਆਪਣੇ ਆਪ ਹੀ ਕਹਿ ਦਿੰਦਾ ਭਈ ਫਿਰ ਮਰਨ ਨੂੰ ਕੀ ਕਰਦਾ ਕਬੀਰ ਨੇ ਕਹਿ ਦਿੱਤਾ ਬਾਬਾ ਅਬ ਨਾ ਬਸੋਏ ਗਾਓ ਧਿਆਨ ਰੱਖਣਾ ਸਾਡੇ ਵਿੱਚੋਂ ਸੰਤ ਖਜਾਲ ਸਿੰਘ ਜੀ ਗਏ ਨੇ ਤੇ ਤਕਰੀਬਨ 82 ਜਾਂ 83 ਸਾਲ ਦੀ ਉਮਰ ਐ ਇਸ ਮੇਲੇ ਹੋਰ ਬੜੇ ਆਰਾਮ ਨਾਲ ਚੱਲਦੇ ਹੁੰਦੇ ਸਨ ਤੇ ਸਰੀਰ ਬਹੁਤਾ ਆਖੇ ਨਹੀਂ ਸੀ ਲੱਗਦਾ ਜਦੋਂ ਇੱਥੇ ਇੱਕ ਜੋ ਸਰੀਰ ਆਇਆ ਤੇ ਕਬੀਰ ਨੂੰ ਪੁੱਛਿਆ ਸੁਣਾਓ ਕੀ ਹਾਲ ਹੈ ਕਿ ਸਤਿ ਰਾਜ ਆਲੇ ਕਹਿੰਦੇ ਨੇ ਗੱਲ ਹੈ ਹਾਲ ਹੁਣ ਕੋਈ ਨਹੀਂ ਇਹ ਕੀ ਹੋਇਆ ਕਹਿੰਦੇ ਬਾਬਾ ਅਬ ਵਸੋ ਇਹ گاਉ ਘਰ-ਘਰੀ ਦਾ ਲੇਖਾ ਮਾਣਦਾ ਕਾਇਥ ਚੇ ਤੂੰ ਮੇਰਾ ਹੁਣ ਇਸ ਸਰੀਰ ਵਿੱਚ ਰਹਿਣ ਨੂੰ ਜੀਰ ਨਹੀਂ ਕਰਦਾ ਆਪਣੇ ਆਪ ਆਖੀ ਤਾ ਹੁਣ ਮੈਂ ਰਹਿਣ ਨੂੰ ਜੀ ਨਹੀਂ ਕਰਦਾ ਇਸ ਪਿੰਡ ਵਿੱਚ ਕੀ ਹੋਇਆ ਹੁਣ ਕਿਉਂ ਨਹੀਂ ਜੀ ਕਰਦਾ ਭਾਵ ਸਰੀਰ ਵਿਰਧ ਹੋ ਗਿਆ ਇੱਥੇ ਹਣਕੇ ਮਹਾਪੁਰਸ਼ਾਂ ਨੇ ਕਹਿ ਦਿੱਤਾ ਕਿ ਮਰਨ ਨੂੰ ਜੀ ਕਰਦਾ ਕਿਸੇ ਮਹਾਪੁਰਸ਼ ਨੂੰ ਪੁੱਛਿਆ ਬੁੜਾਪੇ ਵਿੱਚ ਸੜਾ ਕੀ ਹਾਲ ਹੈ ਕਹਿੰਦਾ ਹਾਲ ਇਹ ਹੈ ਕਿ ਬੁੜਾਪੇ ਸੇ ਡਰਕਰ ਜਵਾਨੀ ਕਾ ਤੂਫਾਨ ਚਲਾ ਗਿਆ ਫੁਰਤੀ ਬਾ ਕਾ ਕਮਸਾਨ ਚਲਾ ਗਿਆ ਦਾੰਤ ਕਾਰ ਅੱਖੇ ਸਭ ਦਾਮਨ ਛੁੜਾ ਗਏ ਬਾਲਮ ਹਮ ਵੀ ਤਿਆਰ ਹੈ ਸਮਾਨ ਚਲਾ ਗਿਆ ਕਹਿੰਦਾ ਹੁਣ ਤੇ ਆਵਾਜ਼ ਦੀ ਤਿਆਰੀ ਆ ਹੁਣ ਲੈਣ ਨੂੰ ਜੀਣੀ ਕਰਦਾ ਤਕਬੀਰ ਨੇ ਕਹਿ ਦਿੱਤਾ ਆ ਜੀ ਮੋਹੇ ਮਰਨੇ ਕਾ ਚਾਹੋ ਹੈ ਮਰੋ ਤਾਂ ਹਰਕ ao ho manne ta ta ho hai bhalla hika bo ho manne ta ta ho hai bhalla hika bo ho manne ta ta ho hai ਦੰਨ ਉਹ ਹਰ ਚੀਜ਼ ਕਰਦਾ ਮਰਦ ਵਾਸਤੇ ਪਰ ਉਹਨੂੰ ਆਖਿਆ ਜਦੋਂ 120 ਸਾਲ ਦੀ ਉਮਰ ਹੋ ਗਈ। ਸਰੀਰ ਬੇਰਸ ਹੋ ਗਿਆ। ਜਦੋਂ ਜੀਵਨ ਬੇਰਸ ਹੋ ਜਾਏ ਤੇ ਜੀਵਨ ਨੂੰ ਜੀ ਨਹੀਂ ਕਰਦਾ। ਕੋਈ ਭਾਵੇਂ ਕੋਈ ਵੀ ਪਦਾਰਥ ਹੋਵੇ, ਕੋਈ ਅਵਸਥਾ ਹੋਵੇ, ਹੱਦ ਤੋਂ ਪਰੇ ਹੋ ਜਾਏ ਤੇ ਉਹਨੂੰ ਉਹਦੇ ਤੋਂ ਛੁਟਕਾਰਾ ਲੈਣ ਦਾ ਛੁੱਟੀ ਲੈਣ ਨੂੰ ਜੀ ਕਰਦਾ। ਮੈਂ ਕਹਿੰਦਾ ਤੁਸੀਂ ਕਿਤੇ ਦੇਖ ਹੱਦ ਤੋਂ ਵੱਧ ਭੋਜਨ ਕਰਕੇ ਇਹ ਭੋਜਨ ਤੁਸੀਂ ਛਕਦੇ ਹੋ ਪ੍ਰਸ਼ਾਦਾ ਲੰਗਰ ਛਕਦੇ ਆ ਜੇ ਤੇ ਕਿਤੇ ਲੋੜ ਅਨਸਾਰ ਛਕਿਆ ਜਾਏ ਤੇ ਜੀਵਨ ਦਿੰਦਾ ਤੇ ਜੇ ਲੋੜ ਤੋਂ ਵੱਧ ਦੋ ਪ੍ਰਸ਼ਾਦੇ ਹੋਰ ਛਕ ਲਿਆ ਜਾਂ ਤੇ ਅਗਲੇ ਦਿਨ ਡਾਕਟਰ ਕੋਲ ਇਹ ਕਿਉਂ ਆ ਇਸ ਵਾਸਤੇ ਕਿ ਹੱਦ ਤੋਂ ਵੱਧ ਕੀਤਾ ਪਾਣੀ ਵਿੱਚੋਂ ਜੀਵਨ ਮਿਲ ਜਾਂ ਪਿਆ ਗੁਰੂ ਸਾਹਿਬ ਕਹਿੰਦੇ ਨੇ ਪਹਿਲਾ ਪਾਣੀ ਜੀਵੋ ਹੈ ਭਾਵੇਂ ਇਹਦੇ ਵਿੱਚ ਜੀਵਨ ਹੈ ਪਾਣੀ ਵਿੱਚ ਸਾਰੀ ਬੰਸਪਤੀ ਦਾ ਜੀਵਨ ਜਿੰਨਾ ਪਾਣੀ ਵਿੱਚ ਹੈ ਤੇ ਜੇ ਧਰਤੀ ਤੇ ਪਾਣੀ ਮਿਲੇ ਤੇ ਧਰਤੀ ਸਾਰੀ ਬੰਜਰ ਹੋ ਜਾਂਦੀ ਹੈ ਵੇਲਾ ਕੁਮਲਾ ਜਾਂਦੀਆਂ ਨੇ ਬਿਰਸ਼ ਕੁਮਲਾ ਜਾਂਦੇ ਨੇ ਕਿੰਜ ਦੇ ਜਲ ਬਿਰ ਸਾਖ ਕੁਮਲਾਕੀ ਉਪਜਾ ਨਹੀਂ ਦਾਮ ਪਾਉ ਪਾਣੀ ਤੋਂ ਬਿਨਾਂ ਕੰਮ ਨਹੀਂ ਚੱਲਦਾ ਜੀਵਨ ਹੈ ਪਾਣੀ ਵਿੱਚ ਤੇ ਮੈਂ ਕਹਿੰਦਾ ਹੁੰਦਾ ਵੀ ਪਾਣੀ ਵਿੱਚ ਫਿਰ ਮੌਤ ਕਿਉਂ ਹੁੰਦੀ ਹੈ ਜੇ ਜੀਵਨ ਹੈ ਤੇ ਮੌਤ ਕਿਉਂ ਹੋਈ ਹੈ ਇਹ ਤੁਸੀਂ ਕਈ ਵਾਰ ਸੁਣਦੇ ਹੋ ਖਬਰਾਂ ਵਿੱਚ ਅੱਜ ਪਹਾਰ ਨੇ ਸਾਹ ਕਿਸ਼ਤੀ ਡੋਬ ਗਈ ਤੇ ਇੰਨੇ ਬੰਦੇ ਬਰ ਡੁੱਬ ਕੇ ਮਰ ਗਏ ਇਹ ਡੁੱਬੇ ਕਿਉਂ ਮਰੇ ਕਿਉਂ ਨੇ ਇਸ ਵਾਸਤੇ ਕਿ ਪਾਣੀ ਹੱਦ ਤੋਂ ਵੱਧ ਹੋ ਗਿਆ ਜਿੱਥੇ ਵੀ ਹੱਦ ਤੋਂ ਵੱਧ ਹੈ ਅੱਗੇ ਤੈਨ ਰੱਖੋਗੇ ਉਸ ਤੋਂ ਅੱਗੇ ਬੇਰਸ ਹੋ ਜਾਏਗਾ ਜੀਵਨ ਪੰਡਿਤ ਗੁਲਾਬ ਸਿੰਘ ਬੈਠੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਪੰਡਿਤ ਜੀ ਕੀ ਹਾਲ ਹੈ ਅੱਜਕੱਲ ਤੁਹਾਡਾ ਤੇ ਆਪਣੀ ਹਾਲਤ ਦੱਸਦਾ ਪੰਡਿਤ ਗੁਲਾਬ ਸਿੰਘ ਕਿੰਦੇ ਤਨ ਕੇ ਬਲ ਨੇ ਅਬ ਪੀਠ ਦਈ ਅਰ ਹਾਰ ਗਏ ਤਿਰਗਪਾਲ ਸੰਗਾਤੀ ਸਰੀਰ ਦਾ ਬਲ ਛੱਡ ਗਿਆ ਜਿਹੜੇ ਬਾਰ ਅਵਸਥਾ ਦੇ ਜਾਰ ਨੇਤਰ ਮੇਤਰ ਇਹ ਵੀ ਜਵਾਬ ਦੇ ਗਏ ਨੇ ਤਜ ਕੇ ਇਹ ਲੋਕ ਵਿਖੇ ਹਮ ਚੱਲ ਆਪ ਗਏ ਸੁਰ ਲੋਕ ਸਜਾਤੀ ਇਹ ਮੈਨੂੰ ਇੱਥੇ ਛੱਡ ਗਏ ਤੇ ਆਪ ਚਲੇ ਗਏ ਮੈਨੂੰ ਛੱਡ ਕੇ ਫਿਰ ਹੁਣ ਕੀ ਹਾਲ ਹੈ ਕਹ ਨੇ ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵ ਕਹਾਂ ਨਾ ਪੁੱਛੈ ਮਮਬਾਤੀ ਅੰਮੈ ਹੁਣ ਤੇ ਜਿਹੜੇ ਦੁਨੀਆ ਦੇ ਯਾਰ ਮਿੱਤਰ ਦੋਸਤ ਸਣਨਾ ਉਹ ਵੀ ਮੂੰਹ ਫੇਰ ਗਏ ਤੇ ਦੂਜੇ ਪਾਸੇ ਨੂੰ ਮੂੰਹ ਫੇਰ ਲੈਂਦੇ ਕੋਈ ਪੁੱਛਦਾ ਹੀ ਨਹੀਂ ਹੁਣ ਸੇਵਾ ਕਰਨੀ ਤੇ ਕਿਤੇ ਰਹਿ ਗਈ ਕੋਈ ਬਾਤ ਹੀ ਨਹੀਂ ਹਾਲ ਨਹੀਂ ਪੁੱਛਦਾ ਤੇਰਾ ਕੀ ਹਾਲ ਹੈ ਮਮ ਆਹੇ ਪਲੰਡਮ ਹੈ ਤ੍ਰਿਸ਼ਨੇ ਇਕ ਤੂੰ ਮਮ ਸੰਗ ਰਹੀ ਜਨੇ ਰਾਤੀ ਭਾਵੇਂ ਆਪਣੀ ਹਾਲਤ ਪ੍ਰਗਟ ਕੀਤੀ ਹੈ ਇਹ ਹੈ ਬੁਢਾਪੇ ਦੀ ਹਾਲਤ ਤਾਂ ਮੈਂ ਅਰਜ ਕਰ ਰਿਹਾ ਸ ਆਹ ਕਬੀਰ ਕਹਿੰਦੇ ਹੁਣ ਮੋਹੇ ਮਰਨੇ ਕਾ ਚਾਹੋ ਹੈ ਹੁਣ ਮੌਤ ਕੋ ਡਰ ਨਹੀਂ ਲੱਗਦਾ ਕਿਉਂਕਿ ਪ੍ਰਮਾਨ ਕਰ ਲਈ ਹੈ ਗੁਰੂ ਸਾਹਿਬਾਂ ਦਾ ਵਿਚਾਰ ਹੈ ਭਈ ਜਿਹਦੇ ਕੋ ਡਰ ਲੱਗਦਾ ਹੋਵੇ ਉਹਨੂੰ ਪ੍ਰਮਾਨ ਕਰ ਲੋ ਡਰ ਮਿਟ ਜਾਏਗਾ ਤੇ ਡਰਦਾ ਬਹੁਤਾ ਮੌਤ ਕੋ ਮਰਨੇ ਤੋਂ ਡਰਦਾ ਹੈ ਕਿੰਨੇ ਜੀਵਨ ਦੀ ਆਸ ਘਟਾ ਦਿਓ ਤੇ ਮਰਨ ਦਾ ਡਰ ਘਟ ਜਾਂਦਾ ਜਿੰਨਾ ਜੀਵਨ ਦੀ ਆਸ ਵਧੇਗੀ ਮਰਨ ਦਾ ਡਰ ਵਧਦਾ ਹੈ ਤੇ ਗੁਰੂ ਗੁਰੂ ਅਰਜਨ ਦੇਵ ਜੀ ਨੇ ਇੱਕ ਬਹੁਤ ਵਧੀਆ ਸੁਝਾਅ ਦਿੱਤਾ ਗੁਰਸਿੱਖਾ ਸਮਾਜ ਵਿੱਚ ਗੁਰਸਿੱਖਾਂ ਵਾਸਤੇ ਸੁਝਾਅ ਇਹ ਦਿੱਤਾ ਭੀ ਇਸ ਤਰ੍ਹਾਂ ਕਰੋ ਪਹਿਲਾਂ ਮਰਨ ਕਬੂਲ ਤੇ ਜੀਵਨ ਕੀ ਛਾਡਾਸ ਗੁਰੂ ਅਰਜਨ ਦੇਵ ਦਾ ਸੁਝਾਅ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਇਹ ਸਮਾਚੇ ਆਉਂਦਾ ਹੀ ਐ ਪਰ ਇਹਨੂੰ ਮੌਤ ਨੂੰ ਮੌਤ ਨਾ ਮੰਨੋ ਮਰਦ ਨੂੰ ਮਰਨਾ ਨਾ ਆਖੋ ਇਹਨੂੰ ਪ੍ਰਵਾਨ ਕਰ ਲਓ ਭਈ ਜਦੋਂ ਵੀ ਆਵੇ ਸਵਾਗਤ ਹੈ ਤੇਰਾ ਜੇ ਤੂੰ ਗੁਰਸ਼ਖ ਨੇ ਕਹਿ ਦਿੱਤਾ ਕਿ ਮੈਨੂੰ ਮੌਤ ਆਵੇ ਭਾਵੇਂ 100 ਵਾਰੀ ਆਵੇ ਮੇਰੇ ਗੁਰੂ ਚਰਨਾਂ ਨਾਲੋਂ ਕਿਤੇ ਪ੍ਰੀਤ ਨਾ ਟੁੱਟ ਜਾਏ ਤੇ ਭਾਵੇਂ 50 ਵਾਰੀ 100 ਵਾਰੀ ਵੀ ਆਉਣਾ ਪਵੇ ਸੰਸਾਰ ਵਿੱਚ ਮੈਨੂੰ ਕੋਈ ਪਰਿਵਾਰ ਕਹਿੰਦਾ ਜੰਮ ਮਰਾਂ ਤੇ ਮਰ ਮਰ ਜੰਮਾਂ ਜਮਾ ਤੇ ਮਰ ਜਾਵਾਂ ਜੇ ਲੱਖ ਜਨਮ ਦੇਵੇ ਰੱਬ ਮੈਨੂੰ ਤੇ ਤੇਰੀ ਪ੍ਰੀਤ ਕਮਾਵਾਂ ਸਭ ਦੁਨੀਆ ਦੇ ਮਿਹਰੇ ਤਾੜੇ ਝੱਲ ਲਵਾ ਮੈਂ ਸਿਰ ਤੇ ਇੱਕ ਤੇਰੇ ਵੱਲੋਂ ਰਹਿ ਜਾਵੇ ਤੇ ਲੱਖ ਲੱਖ ਸ਼ੁਕਰ ਬਣਾਵਾਂ ਮੈਨੂੰ ਮੌਤ ਤੋਂ ਡਰ ਨਹੀਂ ਕੋਈ ਲੱਗਦਾ ਜੇ ਤੇਰੇ ਨਾਲ ਤੇਰੇ ਕਰਮਾਂ ਨਾਲ ਪਣੀ ਲੈ ਬੈਰੀ ਤੇ ਮੈਨੂੰ ਮੌਤ ਦਾ ਤੇ ਡਰੀ ਨਹੀਂ ਨਾ ਮੈਂ ਕਹਿੰਦਾ ਸੰਤ ਖਜਾ ਸਿੰਘ ਜੀ ਇਹ ਪੰਜ ਭਾਦਰੂ ਬਾਏ ਦੇ ਸਤਿਗੁਰਾਂ ਦੇ ਹਜ਼ੂਰ ਤਬਲਾ ਵਜਾ ਕੇ ਗਏ ਦੇ ਜਿਸ ਮਹਾਪੁਰਸ਼ ਦੀ ਜਿਸ ਗੋ ਸਿੱਖ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ குரு ਚਰਣਾ ਨਾਲ ਨਿਭ ਜਾਏ ਇਹਦੀ ਕੋਈ ਕੀਮਤ ਨਹੀਂ ਸੰਸਾਰ ਵਿੱਚ ਕਬੀਰ ਕਹਿੰਦਾ ਕਬੀਰ ਕਹਿੰਦੇ ਨੇ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ ਤੇ ਹੀਰਾ ਕਿਸ ਕਾ ਵਾਪਰੈ ਪੁੱਜੇ ਨਾ ਰਤਨ ਕਰੋੜ ਇੱਥੇ ਕੀਮਤ ਨਹੀਂ ਇਸ ਪ੍ਰੀਤ ਦੀ ਕੋਈ ਜਿਹੜੀ ਗੁਰੂ ਚਰਨਾਂ 'ਚ ਲੱਗੀ ਹੋਈ ਐ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ 8-9 ਸਾਲ ਦੀ ਉਮਰ ਵਿੱਚ ਉਹਨਾਂ ਦੇ ਸਰਨ ਵਿੱਚ ਆਏ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਵਿੱਚ ਆਏ ਦੋਵੇਂ ਭਰਾ ਸੰਤ ਦਰਸ਼ਨ ਸਿੰਘ ਖਾਨ ਸਿੰਘ ਜਿਨ੍ਹਾਂ ਨੇ ਤਕਰੀਬਨ 60-70 ਸਾਲ ਨਾਮਧਾਰੀ ਸਟੇਜ ਨੂੰ ਸੰਭਾਲਿਆ ਤੇ ਹਰ ਵਕਤ ਸਤਗੁਰਾਂ ਨੂੰ ਆਪਣੇ ਗੁਰੂ ਮਹਿਬੂਬ ਨੂੰ ਖੁਸ਼ ਰੱਖਿਆ ਕੀਰਤਨ ਕਰਕੇ ਜਰਾ ਵੀ ਕਿਤੇ ਪਾਸੇ ਨਹੀਂ ਹੋਏ ਕੋਈ ਲੈਨ ਨਹੀਂ ਬਦਲੀ ਕੋਈ ਆਪਣੀ ਮਰਜ਼ੀ ਨਹੀਂ ਕੀਤੀ ਰਜਾ ਵਿੱਚ ਰਹਿ ਕੇ ਸਾਰੀ ਉਮਰ ਬਕੀਤ ਕੀਤੀ ਹੈ ਤੇ ਭਾਈ ਗੁਰਦਾਸ ਕਹਿੰਦੇ ਆਖਰੀ ਅਸਲੀ ਗੁਰਸਿੱਖ ਦੀ ਨਿਸ਼ਾਨੀ ਇਹ ਹੈ ਜਿਨ੍ਹਾਂ ਤੇ ਗੁਰੂ ਕਿਰਪਾ ਹੋ ਜਾਏ ਉਹਨਾਂ ਦੀ ਨਿਸ਼ਾਨੀ ਕੀ ਹੈ ਭਾਈ ਗੁਰਦਾਸ ਕਹਿੰਦੇ ਨੇ ਇਹ ਜੀ ਤੇ ਮੇਰ ਸਤ ਦੀ sad kar de sad kar de sad kar de sad kar de ਆਖੇ ਬੰਦੇ ਨੇ ਗੁਰਮੁਖ ਹੋ ਮੈਂ ਪਰ ਹਰੈ ਬਲ ਪਾਵੈ ਖਸਮੇ ਕਾ ਪਾਣਾ